श्लोक मोहल्ला तीजा सो जप सो तप जे सतगुरु भावै सतगुरु कै भाणे वडियाई पावै कहंदे जप तप दुनिया दे असंख जप असंख तप संत को संत पूजा संत तप तौ तसां ग्रंथ सुख भेद पास ਇਹ ਤਾਂ ਸੰਤ ਨੇ ਸੰਕਿਆ ਨਹੀਂ ਜਿਣੀ ਜਾ ਸਕਦੀ ਪਰ ਜਿਹੜਾ ਸਤਗੁਰੂ ਨੂੰ ਭਾਵੇ ਵਰਗਾ ਚ ਭਾਵੇ ਜੱਪ-ਤਪ ਉਹ ਪ੍ਰਮਾਣ ਹੈ ਬਾਕੀ ਸਭ ਰੋਤੀ ਦੀ ਰੋਟੀ ਬੇਕਾਰ ਕਰਕੇ ਇੱਕੋ ਜਪ ਤਪ ਪ੍ਰਮਾਣ ਹੈ ਜਦੋਂ ਉਹ ਉੱਕੜ ਲੱਗਿਆ ਹੈ ਜਿਹੜੇ ਰੂਹ ਲੱਗਿਆ ਹੈ ਜਿਹੜਾ ਸਰਵਾਨੁ ਹੈ। ਜਦੋਂ ਰੂਹ ਹੀ ਉੱਕੜ ਲੱਗਿਆ ਪ੍ਰਮਾਣ ਹੈ। ਬਾਕੀ ਸਭ ਪ੍ਰਮਾਣ ਨਹੀਂ ਹੈ। ਇਸ ਸਤਗੁਰ ਕੈ ਭਾਣਾ ਵਡਿਆਈ ਪਾਵੇ ਸਤਗੁਰ ਦੇ ਭਾਣੇ ਵਡਿਆਈ ਪਾਵੇ ਜੇ ਸਤਗੁਰ ਨੂੰ ਭਾਉਂਦੀ ਹੈ ਆਪ ਦਾ ਭਾਵ ਹੈਗਾ ਕਿ ਮਨਮਤ ਛੱਡ ਕੇ ਗੁਰਮਤ ਵਿੱਚ ਸਮਾ ਜਾਂਦਾ ਹੈ। ਗੁਰਮਤ ਜਦੋਂ ਅਸੀਂ ਕਹਿੰਦੇ ਆ ਨਾ ਤਾਂ ਇਹ ਲਿਖਾ ਪੈਜ। ਉਹ ਮਰ ਹੋਇਆ ਹੀ ਹੈ। ਉਹ ਕਹਿੰਦਾ ਭਾਈ ਜਿਵੇਂ ਮਰਜੀ ਤੁਸੀਂ ਕਰ ਲਓ। ਮੇਰੀ ਕਦੇ ਵੀ ਮੰਜ਼ੂਰੀ ਨਹੀਂ। ਉਹ ਕਿਸੇ ਦਾ ਵੀ ਬੋਲਾ ਨਹੀਂ ਬਣਦਾ। ਸਭ ਦਾ ਭਲਾ ਹੀ ਹੈ। ਸਭ ਦਾ ਭਲਾ ਕਰਨ ਦਾ ਆਪਣੀ ਬੱਦੀ ਬਾਲ ਦੀ। ਕਭ ਕੋ ਵੀ ਜੇ ਕਰਨਾ ਹੈ ਤਾਂ ਆਪਣੀ ਵਰਦੀ ਬਾਲਦੀ ਬੋ ਠੀਕ ਹੈ ਜੀ ਮਹੱਲਾ ਤੀਜਾ ਗੁਰ ਕੀ ਸਿੱਖ ਕੋ ਵਿਰਲਾ ਲੇਵੈ ਨਾਨਕ ਪਹਿਲਾਂ ਲੱਭ ਲੈਣ ਜਿਹੜੇ ਲੈਣੇ ਆਲੇ ਦੇ ਉਹਨਾਂ ਵੇਦਨ ਆਕਿਆਂ ਦੀ ਟੂੜਗਾ ਤੇ ਬੱਤ ਸਭ ਦਾ ਕਾ ਤਾਰਮ ਫੈਲਦੇ ਹੰਦੇ ਤਾਰਮ ਫੈਲਦੇ ਹੰਦੇ ਤਾਰ ਬਕਾਦ ਕੱਢੀ ਦੇਦੇ ਪੌਲੇ ਚਲਦੇ ਨੇ ਕੂਰ ਲਊਗਾ ਫਿਰ ਉਹਨੂੰ ਐਂਟਰੀ ਦੇ ਦੇ ਉਹ ਤਾਂ ਚਲਦੇ ਨੇ ਤਾਰ ਬਕਾਣੀ ਚਲਦੇ ਇਹਨਾਂ ਦਾ ਤਾਂ ਵੀ ਚਾਹੀਦੀ ਹੈ ਤੇ ਜੋ ਪੈਸੇ ਖਰੇ ਲੈ ਜਾਓ ਹਾਲ ਕੋਟਾ ਜਿੰਨੀ ਭੀੜ ਜਾਦਾ ਹੁੰਦੀ ਹੈ ਬੜੇ ਧਰਮ ਦੇ ਖੇਤਰ ਵਿੱਚ ਜਿੰਨਾ ਫਰਾਡ ਹੈ ਕਿਤੇ ਵਧੀ ਜਿਹੜਾ ਫਰਾਡ ਕੋੜੀ ਮਾਇਆ ਮੋਹ ਅਗਿਆਨ ਪੱਥਰ పాਪ ਬਹੁ ਲੱਦਿਆ ਕਿਉ ਤਾਰੀ ਉਹ ਮੋਹ ਦਾ ਗਿਆਨ ਅਗਿਆਨਤਾ ਮੋਹ ਹੈ ਜੇ ਅਗਿਆਨਤਾ ਹੀ ਨਾ ਹੋਵੇ ਮਾਇਆ ਦਾ ਹੋਏ ਹੁੰਦਾ ਮਾਇਆ ਮੋਹ ਹੋ ਗਿਆ ਪੱਥ ਪਾ ਦੀ ਪੱਥ ਪਾ ਦੀ ਜੇ ਕਦੇ ਜੱਗਲ ਬਣਾਉੱਖਾ ਪੱਥਰ ਪਾਪ ਬਹੁ ਲੱਦਿਆ ਚੁਤਰੀਏ ਤਾਰੀ ਪੱਥਰ ਪਾਇਆ ਹੈ ਦਿਲ ਦੇ ਵਿੱਚ ਪਹਿਲਾਂ ਸਦੀ ਪਾਇਆ ਹੋਇਆ ਖਾਤਰੇ ਪਾਪ ਕਰਦਾ ਇਹਦੇ ਖਾਤਰੇ ਹੁਕਮ ਦਾ ਵਿਰੋਧ ਕਰਦਾ ਪੱਥਰ ਪਾਇਆ ਹੈ ਦਿਲ ਦੇ ਵਿੱਚ ਇਹ ਲਟਿਆ ਹੋਇਆ ਹੈ ਦੇ ਵਿੱਚ ਨਾ ਤਾਰੀ ਫਿਰ ਕਹਿਆ ਮੈਂ ਭਵਸਾ ਜਰ ਤੱਕ ਜੰਗ ਮੈਂ ਤੱਕ ਮੌਤੋਂ ਤੇ ਜੈ ਹੱਥ ਬੰਦਿਆ ਥਾ ਕਦਾ ਦੁਨੀਆ ਭਰ ਦੇ ਆਪਣੇ ਭਗਤ ਬਣਾ ਕੇ ਸਾਰਿਆਂ ਨੂੰ ਕਹਿ ਤਾ ਮੈਂ ਤੈਨੂੰ ਤਾਰ ਦਊਂਗਾ ਤੂੰ ਨਾ ਡੁੱਬੇਗਾ ਰਤਿਆਂ ਹਰ ਪਾਰ ਉਤਾਰੀ ਗੁਰ ਮਨ ਨਿਰਮਲਾ ਜਿਹੜੇ ਭਗਤੀ ਰਹਿੰਦੇ ਨੇ ਠੀਕ ਹੈ ਜੀ ਗੁਰ ਸ਼ਬਦੀ ਤੋਂ ਨਿਰਮਲਾ ਗੁਰ ਉਪਦੇਸ਼ ਗੁਰਦੇ ਨੇ ਹੋ ਨਾ ਨਾ ਨਾ ਜਿਰਪਨ ਹੋ ਜਾਂਦਾ ਕੋਪੇ ਚਾਦੇ ਵਿਕਾਰੀ ਖੋਬੇ ਔਰ ਵਿਕਾਰ ਪਹਿਲੀ 스테ਜ ਹੈ ਸਿੱਖੀ ਦੀ ਪਹਿਲੀ 스테ਜ ਜਿਹੜਾ ਕੱਠੀਆਂ ਦਾਲੀਆਂ ਜਦ ਆਹ ਕੁਝ ਨਹੀਂ ਨਾ ਕਰਦਾ ਹੈ ਪਹਿਲੀਆਂ ਤੋਂ ਨਹੀਂ ਦੋ ਸਿੱਖੀ ਵਾਲੇ ਨਾਲ ਪੈਦਾ ਹੀ ਨਹੀਂ ਹੋ ਠੀਕ ਹੈ ਜੀਆਂ ਦੀ ਹੈ ਉਹਨਾਂ ਸਿੱਖ ਕੰਨ ਦੀ ਲੋੜ ਇਹਦੀ ਹਰ ਹਰ ਨਾਮ ਧਿਆਈ ਹੈ ਹਰ ਹਰ ਮਿਸਤਰੀ ਹਰਾ ਲੋਬ ਦੇ ਵਿੱਚ ਆਖਣੋ ਜਾਈਦਾ ਹਰ ਸਾਰੀ ਹੱਲੇ ਨਲਣਾ ਨਾਲ ਲੱਗਿਆ ਨੇ ਨਲਣਾ ਨਾਲ ਲੱਗ ਮੀ ਕੀ ਠੀਕ ਹੈ ਕੀ ਗਲਤ ਹੈ ਅਗਿਆਨਤਾ ਜੋ ਗਿਆਨ ਨਹੀਂ ਕਰਦਾ ਜੇ ਸੁਪੀਆ ਅਗਿਆਨਤਾ ਇਹਦੇ ਵਿੱਚੋਂ ਬਾਹਰ ਗਿਆਨ ਦੇ ਛੱਡਣ ਦੋ ਹਰ ਹਰ ਕਿੱਡਾ ਕੀ ਭਾਵ ਹੈ ਫਿਰ ਹਰ ਹਰ ਫਰਜ਼ਾ ਗਿਉ ਅੱਛਾ ਅਗਿਆਨਤਾ ਜੋ ਬਾਹਰ ਕੱਢੂਗਾ ਔਰ ਨਈ ਨਿਸ਼ਤਰਾ ਕਰਨਾ ਹਰ ਦੇ ਗਿਆਨ ਨੇ ਹਾਂ ਜੀ ਉਹ ਕੁੱਤੇ ਰੋਜ਼ ਹੈ ਠੀਕ ਹੈ